चंचल चीतना रही ठाए चोरी मृग अंगूरी खाए दुवे पासे चंचल है चित्त हतदा साददा और चंचल है चित्त माया वास्ते माया चंचल ना माया ना जड़ाय चित्त भी चंचल चलाए मोद टेगदा आई दीया चंचल चीतना रही ठाए ओ जगह ਚੋਰੀ ਵਰਗ ਕੂਰੀ ਖਾਏ ਜਿਵੇਂ ਮਰ ਕੇ ਹਮੇਸ਼ਾ ਰੱਖਦਾ ਨਾ ਵੀ ਰੱਖੇ ਤਾਂ ਧਿਆਨ ਦੂਏ ਪਾਸੇ ਹੋਵੇ ਕੋਈ ਉਹਦੀ ਫਸਲ ਖਾ ਲਾਂ ਜਿਹੜੀ ਦਬੀ ਲੂਵੀ ਫੁੱਟੀ ਹੋਈ ਫਸਲ ਹੈ ਬੱਕਰੀ ਹੋਈ ਅੰਗੂਰੀ ਨਾਲ ਅੰਗੂਰੀ ਨਦੀ ਜਕਰੀ ਫੁੱਟੀ ਫਸਲ ਖਾਣਾ ਉਹਦੀ ਲੈਰੀ ਲੈਰੀ ਚੋਰੀ ਤੇ ਐ ਜਾ ਰੱਖਦਾ ਸੰਤ ਜੀ ਕਿਹੜੀ ਇਹਦੇ ਕੋਲ ਨੂੰ ਚੀਜ਼ ਆ ਇਹ ਚੀਜ਼ ਜੈ ਲੋਕ ਮਨ ਮਨ ਤੋਂ ਚੰਚ ਸੁਣਿਆ ਚੀਤ ਵੀ ਚੰਚ ਰਹਿੰਦਾ ਜੀ ਜਿੱਤ ਚੱਜ ਲੋ ਦਮ ਚੱਲ ਕਰਤੇ ਆ ਅੱਛਾ ਜੀ ਕਾਲ ਜੇ ਟਾਰ ਚੱਲਦੀ ਆ ਕੋਨ ਲਾਈਟ ਆ ਟਾਰ ਚੱਲ ਕੇ ਚੱਦੀ ਹੁੰਦੀ ਕਿਵੇਂ ਜੀ ਉੱਤੇ ਅੱਛਾ ਠੀਕ ਹੈ ਤੇ ਮੇਰੇ ਕਿ ਫੇਰ ਮੰਨੂ ਕਿ ਆ ਚੋਰੀ ਮੇਰੇ ਚਰਨ ਕਮਲ ਉਰਤਾਰੇ ਜੀਤ ਸਿਰ ਜੀਵਨ ਚੇਤਨ ਨਿਤ ਨੀਤ ਹਰਦੇ ਵਿੱਚ ਚਰਨ ਕਮਲ ਧਾਰਨ ਕਰਕੇ ਰੱਖਦਾ ਹਰ ਵੇਲੇ ਕੋਈ ਹਰਦੇ ਵਿੱਚ ਹਰ ਵੇਲੇ ਚਰਨ ਕਮਲ ਧਾਰਨ ਕਰਕੇ ਰੱਖੇ ਪਾਵੇ ਚੱਲ ਵੀ ਹੋਵੇ ਪਹਿਲਾਂ ਉਹ ਬਦਲ ਜਾਂਦਾ ਠੀਕ ਹੈ ਉਹ ਗਰਮ ਹੋ ਜਾਂਦਾ ਕਰਕੇ ਚੱਲ ਜਲਦੀ ਤੇ ਇਹਦਾ ਫੇਰ ਗਰਮ ਹੋ ਜਾਂਦਾ ਠੀਕ ਹੈ ਚਿੰਤਾਤ ਹੀ ਦੀਸੇ ਸਭ ਕੋਏ ਛੇਤਾ ਏਕ ਤਾਹੀਂ ਸੁਖ ਹੋਈ ਹਰੀ ਦੁਨਿਆ ਦੇ ਲੋਕ ਚਿੰਤਾ ਗ੍ਰਸਤ ਦਿਖ ਰਾਇਦੇ ਜਦ ਸਾਜ ਦੇ ਬੇਸ ਰਹਿ ਨੇ ਸਾਰੇ ਲੋਕ ਆ ਇੱਕ ਕਦਾ ਚੇਤਾ ਕਰਦੇ ਤੇ ਕਰਨ ਨਾਲ ਜੁੜਦੇ ਸੀ ਜੋਤ ਨਾਲ ਜੁੜਦੇ ਸੀ ਸਰੀਰ ਨੂੰ ਬਾਹਲੇ ਨੂੰ ਛੱਡ ਕੇ ਜਦ ਬੂਰਣ ਨਾਲ ਜੁੜਦੇ ਤੇ ਹਿਸੋ ਹੋਏ ਤੇ ਚੇਤਾ ਭੁੱਲਤ ਹੋ ਜਾਂਦੇ ਨੇ ਪਰ ਚੇਤਾ ਭੁੱਲ ਵੀ ਹੋ ਸਕਦੇ ਤਬੂਕ ਤੋਇਆ ਰੂਸੋ ਖਾ ਹੋਏ ਠੀਕ ਹੈ ਜੀ ਚਿੱਤ ਵਸੈ ਮੁਕਤ ਭਇਆ ਪਤਸ਼ਯੋਂ ਕਰ ਜਾਏ ਜਿੱਤ ਤਵਸੈ ਜਣ ਚਿੱਤ ਵਿੱਚ ਵਸਦਾ ਇਹਨੋ ਉਹਦੇ ਨਾਲ ਦੇ ਨਾਲ ਜੇ ਰਾਜ ਵਿੱਚ ਜਵੇ ਗੋ ਉਹਦੇ ਪਰਚੇ ਚ ਪੈ ਜਾਵੇ ਨਾਲੇ ਕਿ ਫੇਰ ਜੇ ਉਹ ਪਚਾ ਕੇ ਘਰ ਚਲੇ ਜਾਊਗਾ ਫੇਰੇ ਜਬ ਦੀ ਗ੍ਰਿਫਤ ਜੋ ਬਾਹਰ ਹੈ ਜਬ ਜਬ ਦੇ ਪਕੜ ਤੋਂ ਪਰੇ ਹੈ ਫਿਰ ਠੀਕ